ਸੁਭਿਆਰ ਘਰ ਬਿਨਾ ਜਾ ਗੋਕਲ ਕੇ ਵਸਿਆ ਜਿਤ ਹੋਏ ਕਤਰ ਡੁੰਡਾਇਓ ਦਵਾਦਸ ਕੋਸ ਪੈ ਜਾਇ ਪਰਿਓ ਤੋ ਮਿਲ ਪਾਇਓ ਲਾਇ ਲਿਓ ਹੀ ਸੋ ਸਭ ਹੀ ਤਬ ਹੀ ਬਿਲ ਕੈ ਮੰਗਲ ਗਾਇਓ ਤਾ ਝਵ ਕੋ ਜਸੋਚ ਮਹਾ ਕਬਨੈ ਮੁਖਤੇ ਇਮ ਭਾਗ ਸੁਨਾਇਓ ਦਾਇਤ ਕੋ ਰੂਪ ਭਿਆਨਕ ਦੇਖੈ ਗੋਪ ਸਭੋ ਮਨ ਮੈ ਡਰ ਕੀਆ ਮਾਨਸ ਕੀ ਕਾ ਹੈ ਗੰਤੀ ਸੁਰੂ ਰਾਜ ਹੈ ਕੋ ਫਾਟ 파ਟ ਤਹੀਆ ਐਸੂ ਮਹਾ ਵਿਗਰਾਲ ਸਰੂਪ ਤਿਸੈ ਹਰ ਨੇ ਛਿਨ ਮੈਂ ਹਨ ਲੀਆ ਆਏ ਸੁਨਿਓ ਆਪਣੇ ਗ੍ਰਹ ਮੈਂ ਤੇ ਕੋ ਬ੍ਰਤਾ ਸਭੈ ਕਹਿ ਦੀਆ ਬਹੁ ਵਿਪਨ ਕੋ ਤਵ ਸੋ ਖੇਲ ਤ ਹੈ ਸੁਦ ਸੋਪਨਮਾਈ ਅੰਗੁਲ ਕੈ ਮੁਖ ਸਾਵੇਂ ਹੋਤਹੀ ਭਲੇ ਹਰ ਜੀ ਮੁਸਕਾਈ आनंद होत महा जसदा मन और कहा कहो तो हे बडाई ता छब की उपमा ਤੇ पै कबके मन में तन ते अति भाई अथ सारी विश्व मुख सो कृष्ण की जसोदा को दिखाई सोया मोहे बढाए महा मन में हर कहो लगी फेर खिलावन मई तो हर जी मन मद ਚਕ੍ਰਿਤ ਹੋਏ ਰਹੀ ਜਸੁਦਾ ਮਨ ਮਦ ਭਈ ਤਿਹਕੇ ਦੁਚਿਤਾਈ ਮਾਏ ਸੋ ਢਾਪ ਲਈ ਤਭੀ ਤਿਨ ਜੋ ਲਖ ਪਾਈ ਚਲੇ ਘੁੰਟੂਆ ਕਰ ਭੀਤਰ ਮਾਤ ਕਰੈ ਉਪਮਾ ਤਿਹ ਚੰਗੀ ਲਾਲਨ ਕੀ ਮਨ ਖਾਲ ਕੇ ਦਉ ਨੰਦ ਧਨ ਸਵੈ ਤਿਹਕੇ ਸਭ ਸੰਗੀ ਲਾਲ ਪਈ ਜਸਦਾ ਭਿਗ ਪੁੱਤਰ ਹੈ ਜੋ ਘਨ ਮੈ ਚਮਕੈ ਦੁ ਤਰੰਗੀ ਕਿਉ ਨਾ ਹੋਵੈ ਪ੍ਰਸੰਨ ਸੋ ਮਾਤ ਭਇਓ ਜਿਨ ਕੀ ਗ੍ਰਹਤਾ ਤ੍ਰਿਭੰਗੀ ਥਵਿਆ ਰਹਾ ਸਿਖਾਵਨ ਕਾਜ ਗਢੀ ਹਰ ਗੋਪ ਮਨੋ ਮਿਲ ਕੈ ਸੋ ਬਨਾਇਓ ਕਾਨ੍ਹੈ ਤੇਹੂ ਪੈ ਬਿਠਾਏ ਕੈ ਆਪਣੇ ਆਂਗਨ ਬੀਤਵਾਇਓ ਫੇਰ ਉਠਾਏ ਲਿਓ ਜਿਸਦਾ ਉਰਮੇ ਗਹਿ ਕੈ ਪੈ ਪਾਨ ਕਰਾਇਓ ਸੋਏ ਰਹੇ ਹਰ ਜੀ ਤਵਹੀ ਕਬਨੇ ਆਪਣੇ ਮਨ ਮੈਂ ਸੁਖ ਪਾਇਓ ਦੋਹਰਾ ਜਬ ਹੀ ਨਿੰਦਰਾ ਛੁੱਟ ਗਈ ਹਰੀ ਉਠੇ ਤਤਕਾਲ ਖੇਲ ਖਿਲਾਵਨ ਸੋ ਕਰਿਓ ਲੋਚਨ ਜਾਹੇ ਵਿਸਾਲ ਇਸੀ ਪੌਂਦਸੂ ਕ੍ਰਿਸ਼ਨ ਜੀ ਖੇਲ ਕਰੇ ਬ੍ਰਜ ਮਾਹੇ ਅਬ ਪਗ ਚਲ ਤਿਉ ਕਥਾ ਕਹੋ ਸੁਨੋ ਨਰਨਾਹੇ ਸੁਇਆ ਸਾਲ ਬਤੀਤ ਭਇਓ ਜਵਹੀ ਤਬ ਕਾਨ ਭਇਓ ਬਲ ਕੈ ਪਗ ਮੈਂ ਜਸ ਮਾਤ ਭਹੀ ਮਨ ਮੈਂ ਵਿਖ ਧਾਵਤ ਪੁੱਤਰ ਹੈ ਕਉ ਮਗ ਬਾਤ ਕਹੀ ਗੋਪਨ ਸੋ ਪ੍ਰਭਾ ਫੈਰ ਰਹੀ ਸੋ ਸਵੈ ਜਗ ਮੈਂ ਜਨ ਸੁੰਦਰ ਤੀ ਅਤਿ ਮਾਖਨ ਕਉ ਸਭ ਹਰ ਕੀ ਨਗ ਮੈਂ गोपन सो मिल कै हरि दी जमुना तट खेल मचावत है जिम भूंत है खग भूंत है जिम थावत है तिम थावत है फिर बैठ बरेतन मद्ध मनो हरसो वा ताल बजावत है कब शाम कहे तिन की उपमा शुभ गीत भले मुख गावत है स्विया ਕੁੰਜਨ ਮਹਿ ਜਮਨਾ ਤਟ ਤੇ ਮਿਲ ਗੋਪਨ ਸੋ ਹਰ ਖੇਲਤ ਹੈ ਤਰਕੈ ਤਬ ਹੀ ਜਮਨਾ ਹਟ ਮਦ ਬਰੇ ਤਨ ਪੇਲਤ ਹੈ ਫੇਰ ਕੂਦਤ ਹੈ ਜੋ ਮਨੋ ਨਟ ਜਿਉ ਜਲ ਕੋ ਹਿਰਦੇ ਸੰਗ ਰੇਲਤ ਹੈ ਫੇਰ ਵਹਿ ਹੁੰਡੂਆ ਲਰਕੇ ਤੂੰ ਔਰਤੇ ਆਪਸ ਮਹਿ ਸਿਰ ਮੇਲਤ ਹੈ ਆਏ ਜਵੈ ਹਰ ਦੀ ਗ੍ਰਹਿ ਆਪਣੇ ਖਾਇ ਕੈ ਭੋਜਨ ਖੇਲਣ ਲਾਗੇ मात कह न रह कर पीतरे बाहर को तब ही उठ भागे श्याम कह तिन की उपमा ब्रज के पद बीथन में अनुरागे खेल मचाए दयो लोक मीचन गोप सवै तिहि के रस भागे खेलत है जमुना तट पर मन आनद कहे हरि बार नसों चढ़ रूख चलावत सोठ के दो सौत है कह ल्यावे ग्वाल नसों कब श्याम लखी तिन की उपमा मनोमध अनंत अपार नसों बल जा सबय मुन देखन कहो करकै बहु योग हजार नसों इथ श्री विचित्र नाटक के ग्रंथे कृष्णा अवतारे गोपन सो खेल बो वर्णन अष्टम अध्याय समाप्तम आत्म चोर खैव ओ कथनं सोइया ਖੇਲਣ ਕੇ ਮਿਸ ਪੈ ਹਰਦੀ ਕਰ ਪੀਤਰ ਪੈਠ ਕੇ ਮੱਖਣ ਖਾਵੇ ਨੈਣਨ ਸਹਿਨ ਤਬੈ ਕਰ ਕੇ ਸਭ ਗੋਪਨ ਗੋ ਤਬ ਹੀ ਸੋ ਖੁਲਾਵੇ ਬਾਕੀ ਬਚਿਓ ਆਪਣੇ ਕਰ ਲੈ ਕੇ ਮੁਖ ਭੀਤਰ ਪਾਵੇ ਸ਼ਾਮ ਕਹੈ ਤੇ ਕੀ ਉਪਮਾ ਇਹ ਕੈ ਬਿਪ ਗੋਪਨ ਕਾਨ ਖਿਜਾਵੇ ਖਾਏ ਗਇਓ ਹਰਦੀ ਜਬ ਮੱਖਣ ਤੋ ਗੁਬਿਆ ਸਭ ਜਾਏ ਪੁਕਾਰੀ ਬਾਤ ਸੁਨੋ ਪਤ ਕੀ ਪਤਨੀ ਤੁਮ ਢਾਰ ਦੇਈ ਦਦ ਕੀ ਸਭ ਕੰਹ ਕਹਿ ਡਰਤੇ ਹਮ ਝੋੜ ਕੈ ਰਾਖਤ ਹੈ ਚੜ ਉੱਚ ਊਖਲ ਕੋ ਧਰ ਮਨਹਾ ਪਰ ਖਾਤੈ ਲੰਗਰ ਦੇ ਕਰਗਾਰੀ ਹੋਤ ਨਹੀਂ ਜੇ ਕੇ ਕਰ ਮੈਂ ਦਦ ਦਇ ਕਰ ਸੋਰ ਕਰੈ ਹੈ ਜੋ ਲਰਕਾ ਜਨ ਕੈ ਖਿਦ ਹੈ ਜਨ ਤੋ ਮਿਲ ਸੋਟਨ ਸਾਥ ਮਰੈ ਹੈ ਆਏ ਪਰੈ ਜੋ ਤ੍ਰਿਆ ਤੇ ਪੈ ਤੇ ਬਾਰ ਉਖਾਰ ਡਰੈ ਹੈ ਬਾਤ ਸੁਨੋ ਜਸੁਦਾ ਸੋ ਬਿਨਾ ਉਤਪਾਤ ਨਾ ਕਾਹ ਡਰੈ ਹੈ ਬਾਤ ਸੁਣੀ ਜਬ ਗੋਪਨ ਕੀ ਜਸੁਦਾ ਤਬ ਹੀ ਮਰ ਮਾਇ ਖੀਜੀਐ ਆਏ ਗਿਓ ਹਰ ਦੀ ਤਬ ਹੀ ਪਖ ਪੁੱਤਰ ਕੋ ਮਨ ਮਾਹਿ ਰੀਜੀਐ ਬੋਲ ਉਠੇ ਨੰਦ ਲਾਲ ਤਵੈ ਇਹ ਗੁਆਰ ਖਜਾਵਨ ਹੈ ਮਾਤ ਕਹਾ ਦੋਸ ਨਗਾਵਤ ਮਾਰ ਬਿਨਾ ਇਹ ਨਾਐ ਸਿਜੀਐ ਮਾਤ ਕਹਿਓ ਆਪਣੇ ਸੁਤ ਕੋ ਕਹੋ ਕਿਉ ਕਰ ਤੋਇ ਗੋਪੀ ਮਾਤ ਸੋ ਬਾਤ ਕਹੀ ਸੁਤ ਜੋ ਕਰ ਸੋ ਗਹਿ ਭਾਗਤ ਹੈ ਮੋਹਿ ਟੋਪੀ ਡਾਰਕ ਐਲਾਸ ਵਿਖੈ ਅੰਗਰੀ ਸਿਰ ਮਾਰਤ ਹੈ ਮੁਝ ਕੋ ਵੈ ਥੋਪੀ ਨਾ ਕਸਾਇ ਹਸਾਇ ਉਠੈ ਫਿਰ ਲੈ ਤਵੈ ਵਹ ਦੇਤ ਹੈ ਟੋਪੀ ਜਸਦਾ ਬਾਜ ਗੋਪਨ ਸੋ ਸੁਵਈਆ ਮਾਤ ਖਿਜੀਏ ਉਨ ਗੋਪਨ ਕੋ ਤੁਮ ਕਿਉ ਸੁਧ ਮੋਏ ਬੋਲਤ ਹੋ ਆਪਣੇ ਮੁਖਤੇ ਖਮਰੇ ਧਨ ਹੈ ਦਦ ਦਾਮ ਸੋ ਗਉਰੀ ਮੂੜ ਅਹੀਰ ਨਾ ਜਾਣਤ ਹੈ ਵੱਡ ਬੋਲਤ ਹੋ ਸੁਰ ਹੋ ਤੂੰ ਠੌਰੀ ਕਾਨ ਹੈ ਸਾਥ ਬਿਨਾ ਅਪਰਾਧੈ ਬੋਲੈ ਕੀ ਜੋ ਭਈ ਕਛ ਬਉਰੀਂ ਘੋਰਾ ਬਿੰਤੀ ਕਹਿ ਜਸ ਦਾਤ ਵੈ ਦਉ ਦਇ ਮਿਲਾਏ ਕਾਨ ਬਿਗਾਰੈ ਸੇਰ ਦਦ ਦੇਹੋ ਮਨਕ ਤੁਮ ਆਏ ਗੋਪੀ ਬਾਤ ਜਸਤਾ ਸੁੰਗ ਹੋਰਾ ਤਬ ਗੋਪੀ ਮਿਲ ਜੋਕ ਹੀ ਮੋਹਨ ਜੀਵੈ ਤੋਹੇ ਯਾਹ ਦੇਹ ਖਮਖਾਨ ਦਦ ਸਭ ਮਨ ਕਰੈ ਨਾ ਕਰੋਹੇ ਇਸ ਸ੍ਰੀਮਚਿਤਰਨਾਟ ਗ੍ਰੰਥੇ ਕ੍ਰਿਸ਼ਨ ਉਤਾਰੇ ਮੱਖਣ ਚਰੈ ਵੋ ਵਰਨਨ ਅਥ ਜਸਦਾ ਕੋ ਜਿਸ ਸਾਰੀ ਮੁਖ ਪ੍ਰਸਾਰ ਦਿਖੈ ਵੋ ਸਵਿਆ ਗੋਪੀ ਗਈ ਆਪਣੇ ਘਰ ਮੈਂ ਤਬ ਤੇ ਹਰਦੀ ਇੱਕ ਖੇਲ ਮਚਾਈ ਸੰਗ ਲੈ ਉਹ ਆਪਣੇ ਮੁਸਲੀ ਤਰ ਦੇਖਤਾ ਮਿਟਿਆ ਅਨਖਾਈ ਭੋਜਨ ਖਾਨਾ ਕੋ ਤਜ ਖੇਲੇ ਸੋ ਗੁਵਾਰ ਚਲੇ ਘਰ ਕੋ ਸਭ ਜਾਇ ਖਲੀਸੋ ਕਹੋ ਜਸਦਾ ਪਹਿ ਬਾਤ ਵਹਿ ਦਿਨ ਖੋਲ ਸੁਨਾਈ ਮਾਤ ਕਹਿਓ ਰਿਸ ਕੈ ਕੋ ਤਬ ਲੈ ਛਿਟਿਆ ਤਨ ਤਾਹੇ ਪ੍ਰਹਾਰਿਓ ਤਉ ਮਨ ਮਧ ਡਰਿਓ ਹਰਦੀ ਜਸੁਦਾ ਜਸਦਾ ਕਰ ਕਹਿ ਜੋ ਪੁਕਾਰਿਓ ਦੇਖੋ ਆਏ ਸਵੇ ਮੋਹ ਮਾਤ ਕਹਿਓ ਤਬ ਤਾਤ ਪਸਾਰਿਓ ਸ਼ਿਆਮ ਕਹੈ ਤਿਨ ਆਨਨ ਹੈ ਸਭ ਹੀ ਧਰ ਮੂਰਤ ਵਿਸੁਗ ਦਿਖਾਰਿਓ ਸਿੰਧ ਤਰਾ ਤਰਿਓ ਤਰਨੀ ਸਭ ਥਾਂ ਕੋ ਪੁਰਿਓ ਪੁਰਨਾਗਨੀ ਔਰ ਸਵੈ ਨਿਰਖੇ ਤਿਹ ਮੈਂ ਪੁਰਬੇਦ ਪੜਾਇ ਬ੍ਰਹਮਾ ਗਣਿਤਾ ਗਨੇ ਹਿਰਦਿ ਓ ਸਿਦਿਓ ਆਪਣੇ ਦੇਖੈ ਜਾਨ ਅਭੇ ਲਗੀ ਪਗ ਲਾਗਨੇ ਸ਼ਿਆਮ ਕਹੈ ਤਿਨ ਚਛਣ ਸੋ ਸਭ ਦੇਖ ਲਿਓ ਜੋ ਬੜੀ ਬੜ ਭਾਗੇ ਦਹੋਰਾ ਜੇ ਰਜ ਸਵੇਤਜ ਉਤਪਜਾ ਦੇਖੇ ਤਿਨ ਤਿਹ ਜਾਏ ਪੁੱਤਰ ਭਾਵ ਕੋ ਦੂਰ ਕਰ ਪਾਇਨ ਲਾਗੀ ਤਾਏ ਇਸ ਰੀਪਿਚ ਤਰਨਾਟ ਗ੍ਰੰਥੇ ਕ੍ਰਿਸ਼ਨਾ ਉਤਾਰੇ ਮਾਤ ਜਸਤਾ ਕੋ ਮੁਖ ਬਸਾਰ ਬਿਸਮ ਰੂਪ ਦਿਖੈ